ਦਿ ਲੋਕ ਦੂਜਾ ਨਾਉ ਫਕੀਰੇ ਪਾਤਸ਼ਾ ਮੂਰਖ ਪੰਡਤ ਨਾਉ ਅੰਧੇ ਕਾ ਨਾਉ 파ਰਕੂ ਕਰੇ ਗਵਾਉ ਅਨਾਂ ਫਕੀਰੇ ਬਾਜਾ ਜਿਹੜੇ ਫਕੀਰ ਲੋ ਲੋਕ ਲੇ ਨਾ ਫਕੀਰ ਬਾਰ ਬਾਰ ਵਧੀ ਹੁੰਦਾ ਜਿਨ੍ਹਾਂ ਦਾ ਕੋਰ ਕੋਈ ਬਹੁਤਾ ਸਮਾਨ ਬੜੀ ਹੁੰਦਾ ਦੂਜੇ ਦੇ ਘਰ ਤੋਂ ਬਣ ਕੇ ਖਾਂਦੇ ਨੇ ਬੇਫਿਕਰ ਰਹਿੰਦੇ ਨੇ ਉਹਨਾਂ ਨੂੰ ਲੋਕ ਪਾਤਸ਼ਾਹ ਕਹਿੰਦੇ ਨੇ ਅਸਲ ਚ ਪਾਤਸ਼ਾਹ ਉਹੀ ਨੇ ਉਹ ਬਾਦਸ਼ਾਹ ਨੇ ਬੇਪਰਵਾਹ ਨੇ ਗੁਰੂ ਕੇ ਪੰਡਤ ਨੂੰ ਪੰਡਤਾਂ ਨੂੰ ਕੀ ਗੁਰੂ 12 ਨੇ ਘਰਬਾੜ ਪਣਾਇਆ ਹੈ ਲੋਕਾਂ ਨੂੰ ਸਿੱਖਿਆ ਦਿੰਦਾ ਹੈ ਪਰ ਪੰਡਤ ਲੋਕਾਂ ਨੂੰ ਕਹਿੰਦਾ ਆਪ ਨਹੀਂ ਕਰਦਾ ਫਕੀਰ ਆਪ ਕਰਦਾ ਲੋਕਾਂ ਨੂੰ ਸਿੱਖਿਆ ਘਟ ਦਿੰਦਾ ਫਕੀਰ ਆਪ ਰੋਲ ਮਾਡਲ ਬਣਿਆ ਹੈ ਿਆਗ ਦੀ ਭੂਰਤੀ ਬਣਿਆ ਪੰਡਤ ਗੱਲਾਂ ਕਰਦਾ ਛੱਡਦਾ ਦੀ ਗੁਰਖ ਗੁਰਖ ਪੰਡਤਾਂ ਨੂੰ ਪੰਡਤਾਂ ਨੂੰ ਗੁਰਖ ਪੰਡਤ ਬੇਦਵਾਨਾਂ ਬੇਦਵਾਨ ਹੁੰਦੇ ਹੀ ਗੁਰਖ ਨੇ ਗੁਰਬਾਣੀ ਪਤਾ ਨਹੀਂ ਕਿਉਂ ਵਿਦਵਾਨਾਂ ਨੂੰ ਗੁਰਖ ਹੀ ਜਾਂਦੀ ਹੈ ਵਿਦਵਾਨ ਕਹਣਗੇ ਸਾਡੀ ਸਾਧੂ ਇਹ ਕਹਿੰਦੇ ਤੇ ਨੇ ਇਹਦਾ ਭਾਵੇਂ ਤੇ ਵੀ ਲੋਕ ਟੀਚਰ ਕਰਕੇ ਫਕੀਰਾਂ ਨੂੰ ਪਾਸ਼ਾਦਾਸ ਦੇ ਨਾ ਨਾ ਨਾ ਅੱਛਾ ਜੀ ਇਹ ਪਾਸ਼ਾ ਹੀ ਅੱਛਾ ਤੇ ਪੰਦਰ ਜਦ ਮਾਇਆ ਦੀ ਭੁੱਖਾ ਹੋਵੇ ਪਾਸ਼ਾ ਦਾ ਉਹ ਹੈ ਲੋੜ ਆਉਂਦੇ ਅੰਦਰ ਭੁੱਖ ਦੀ ਮੂਰਖਾ ਪੜਨ ਤ ਮੂਰਖ ਕਿਉਂ ਕਰਦਾ ਦੋ ਪੰਨ ਤ ਹੋ ਇਹਨਾਂ ਚਾਰ ਇਕੱਠੇ ਹੋ ਬੈਸ ਕਰਦੇ ਨੇ ਮੂਰਖ ਕਹਿੰਦੇ ਫਿਰ ਲੜਕੇ ਦੀ ਬੈਠ ਸਕਦੇ ਬੁਰਾਈ ਕਰਦੇ ਨੇ ਕਿ ਤੂੰ ਇਹਦੀ ਫਕੀਰ ਕੁதுਬ ਦੀ ਬੁਰਾਈ ਨਹੀਂ ਕਰਦੇ ਹਾਂਜੀ ਅੰਦੇ ਕਾਣਾں ਪਾਰਖੂ ਇਹ ਮੈਂ ਕਰੈ ਗੁਆਵ ਨਾ ਨਾ ਜਿਹੜੇ ਉਹਨਾਂ ਨੂੰ ਪਾਰਖੂ ਬੰਦਿਆ ਹੋਇਆ ਹੈ ਨੇ ਇਹੀ ਲੋਕ ਹੈ ਪੰਡਤ ਦੀ ਬੋਲੀ ਘੜੀ ਹੋਈ ਲੋਕ ਬੋਲੀ ਜਾਂਦੇ ਨੇ ਅੰਦੇ ਦਾ ਨਾ ਪਾਰਖੂ ਬੰਦਿਆ ਆਇਆ ਪੰਡਤ ਨੇ ਲੋਕ ਵੀ ਉਹਨੂੰ ਪਾਰਖੂ ਮੰਨਦੇ ਨੇ ਪੰਡਤ ਆਮੂਰ ਖਾਨਾ ਤੇਦੀ ਕਹਿੰਦਾ ਪੰਡਤ ਵੀ ਮੈਨੂੰ ਉਹ ਪਾਰਖੂ ਕਹਿੰਦਾ ਆਪਣੇ ਆਪ ਨੂੰ ਕੰਦੇ ਅਗਿਆਦੀ ਪਾਰਖੂ ਇਹ ਮੈਂ ਕਰੇ ਗਵਾਉ ਇਸ ਪਰੋਚੇ ਇਹੋ ਗਿਆਨ ਦਾ ਜਿਹੜਾ ਹੈ ਆਪਣੇ ਦਾ ਨੁਕਸਾਨ ਕਰੀ ਜਾਂਦਾ ਸਾਰਾ ਗਿਆਨ ਗਵਾ ਲਿਆ ਉਹਨੇ ਰੋਵੇ ਪੰਡਤ ਗਿਆਨ ਗਵਾਏ ਸਭ ਕੁਝ ਗਵਾ ਲਿਆ ਧਰਬਦੌੜ ਨੇ ਪੰਡਤ ਨੇ ਇਸ ਪਰੋਚੇ ਪੱਲੇ ਨੂੰ ਪਾਰਖੂ ਬੰਦ ਕੇ ਅੱਖੋਂ ਨਹੀਂ ਰੱਖਿਆ ਪੰਡਤ ਪੱਲੇ ਹੀ ਕੱਖ ਨਹੀਂ ਰਹਾ ਰੋਵੇ ਪੰਡਤ ਗਿਆਨ ਗਵਾਏ ਦਾਜਾਲ ਬੁੰਨੇ ਤੇ ਖਿਆ ਜਾਏ हां जी ए बोल कौन रहे पंक्ति 9 फकीरे बादशाह गुरुमुख बोल रहे है गुरुमुख आज आते गुरुमुख के दस रहे भी है भी मूर्ख ने जेडे पंडिता मूर्ख है जी अबलगनू दस रहे है जेडे पंडित दे चेले ने उनू अच्छा जी पंडित भी बोल खोल रहे है पंडितों बेचारा इल्ति का नाम चौधरी कूड़ी पूरे ठाऊं नानक गुरुमुखी जानी है कल का एहे न आओ इल्ति का नाम चौधरी जेड़े शरारती होंदे ने इल्ति शरारती आदमी ने विच शरारता करने वाले चौधरी बने होए ने साडे भी शरारता करदे ने लोग सियासत दा ने चौधरी ने ਕੋਈ ਨਾ ਕੋਈ ਨਮਾਜ਼ ਡੰਡ ਘੜਾ ਕਰ ਦੇਣਾ ਚੌਧਰੀ ਬਣਿਆ ਨੇ ਤੇਜਰੀਵਾਲ ਵਰਗੇ سارے ਵਿਚਾਰ ਆਤੀ ਨੇ ਚੌਧਰੀ ਬਣਨ ਵਾਸਤੇ ਸ਼ਰਤ ਜ਼ਰੂਰੀ ਹੈ ਇਲਤਿਕਾਣਾ ਚੌਧਰੀ ਚੌਧਰੀ ਬੰਦਨੇ ਲੋਕ ਇਲਤੀਓ ਚੰਗੇ ਨੂੰ ਚੰਗਾ ਨਹੀਂ ਕਹਿਣਾ ਚੰਗੇ ਚ ਵੀ ਨੂੰ ਹੋਛਾ ਕੱਢਣੀ ਸੱਚ ਨੂੰ ਸੱਚ ਨਹੀਂ ਬਣਾਣਾ ਸੱਚ ਦੇ ਵਿੱਚ ਨੂੰ ਹੋਛਾ ਕੱਢਣੀ ਉਹ ਚੌਧਰੀ ਬਣਦੇ ਨੇ ਟੋਪਾਂ ਦੇ ਹਾਂਜੀ ਕੂੜੀ ਪੂਰੇ ਥਾਂ ਕੂੜੀ ਐ ਜਿਹੜੀ ਝੂਠੀ ਬੁੱਧੀ ਐ ਉਹ ਥਾਂ ਪੂਰਾ ਕਰਦੀ ਐ ਉਹ ਇੱਲਤ ਨੂੰ ਚੌਧਰੀ ਬਣਾ ਕੇ ਉਹਨੂੰ ਇੱਲਤ ਦੀ ਜਗ੍ਹਾ ਚੌਧਰ ਦਾ ਨਾਮ ਦੇਤਾ ਇੱਜ਼ਤ ਬਣਾਤੀ ਬੇਇੱਜ਼ਤੀ ਦੀ ਜਗ੍ਹਾ ਉਹਨੂੰ ਇੱਜ਼ਤ ਦੇਤੀ ਜਿਹੜੀ ਕੂੜੀ ਮਤ ਐ ਜਿੱਥੇ ਗਿਆਨ ਦੀ ਕਮੀ ਐ ਜਿਹੜਾ ਗਿਆਨ ਐ ਉਹਨੂੰ ਉਹਨੇ ਚੌਧਰੀ ਕਹਤਾ ਹੈ ਚੌਧਰੀ ਬਣਾਤਾ ਉਹਨੂੰ ਫਿਰ ਉਹ ਤਾਂ ਸਹਿਮਤੀ ਦਊ ਕੂੜੀ ਦੇ ਨਾਲ ਉੜੀ ਨੂੰ ਸ਼ਾਂਤੀ ਤਾਂ ਹੀ ਦਊਗਾ ਉਹ ਦਾ ਤਰਫਦਾ ਦੀ ਤਾਂ ਉਹ ਚੌਧਰੀ ਹੁਣ ਚੌਧਰੀ ਕਹਤਾ ਉਹਨੇ ਹਾਂ ਜੀ ਨਾਨਕ ਗੁਰਮੁਖੀ ਜਾਣੀ ਹੈ ਕੱਲ ਦਾ ਇਹ ਨਿਉਂ ਨਾਨਕ ਗੁਰਮੁਖੀ ਜਾਣੀ ਹੈ ਗੁਰਮਖਾਂ ਨੇ ਜਾਣਿਆ ਹੈ ਕੱਲ ਦਾ ਇਹ ਹਿਸਾਬ है, ਕੱਲ ਵਿੱਚ ਹੀ ਹਿਸਾਬ ਹੋ ਰਿਹਾ ਮਾਇਆ ਵਿੱਚ ਗਰਸ ਕੇ ਇਸ ਤਰ੍ਹਾਂ ਦਾ ਹੀ ਨਿਆਉ ਹੋਊਗਾ ਹਾਂਜੀ ਮਾਇਆ ਧਾਰੀਆਂ ਦਾ ਨਿਆਉ ਐਜਾ ਹੀ ਹੁੰਦਾ ਹਾਂਜੀ ਮਹੱਲਾ ਪਹਿਲਾ ਹਰਣਾ ਬਾਜਾਂ ਤੈ ਸਿਕਦਾਰਾਂ ਇੰਨਾ ਪੜਿਆ ਨਾਉ ਪਾਹੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ ਹਰਣਾ ਬਾਜਾਂ ਤੇ ਸਿਕਦਾਰਾਂ ਹਲੁੰਦ ਨੇ ਹੱਲਣ ਨੇ ਜਛੋੜੇ ਬੱਚੇ ਉਹਨੂੰ ਸਖਲਾਈ ਕਰਾ ਲੈਂਦੇ ਨੇ ਉਹ ਆਦਮੀ ਤਾਂ ਡਰਦੇ ਹੀ ਆਦਮੀ ਦੇ ਕੋਲੇ ਲੈਣੇ ਨੇ ਬਾਜਨੇ ਮੈਂ ਬਾਜਾ ਨੂੰ ਸਕਲਾਈ ਕਰਾ ਲੈਂਦੇ ਨੇ ਬਾਜ ਆਦਮੀ ਦੇ ਕੋਲੇ ਲੈਣੇ ਨੇ ਮਿਲ ਜਾਂਦੇ ਨੇ ਜਿੰਨਾ ਚੰਗਾ ਖਰਾਕ ਠੜਾਉਂਦੇ ਰਹਿਣ ਨੂੰ ਤੇ ਸਿੱਖਦਾਰਾਂ ਤੇ ਕਸਾਕਤ ਤੇ ਤਿੰਨੇ ਕੋਈ ਸਾਡਾ ਗਰੀਬੇ ਬੰਦੇ ਨੇ ਥੋੜਾ ਜਿਹਾ ਗਿਆਨ ਪੜ ਕੇ ਕੀ ਕਰਦੇ ਨੇ ਇੰਨਾ ਪੜਿਆ ਲੋਕ ਥੋੜਾ ਜਿਹਾ ਗਿਆਨ ਪੜ ਲੈਦੇ ਫਾਇ ਲੱਗੀ ਜਾਂ ਫਾਇਨ ਫਾਇ ਲੱਗੀ ਐ ਜਬ ਦੀ ਭਾਇ ਚਾ ਲੋਕਾਂ ਨੂੰ ਫਸਾਈ ਜਾਂਦੇ ਨੇ ਉੱਠਾ ਗਿਆਨ ਕਰਾ ਕੇ ਭਾਇ ਦਾ ਬੋਝ ਫਸਾਈ ਜਾਂਦੇ ਨੇ ਲੋਭ ਕ੍ਰੀਏਟ ਕਰੀ ਜਾਂਦੇ ਨੇ ਤੇ ਰੋਗ ਦੀਆਂ ਦਰਖਾਸਤਾਂ ਕਰੋ ਜੀ ਖੰਡ ਪਾਠ ਕਰਾਓ ਜੀ ਉਹ ਕਰੋ ਹੁਕਮ ਤੋਂ ਬਾਗੀ ਕਰਦੇ ਨੇ ਪਰ ਮੈਸਲ ਦੇ ਹੁਕਮ ਤੋਂ ਪਾਣੀ ਤੋਂ ਬਾਗੀ ਕਰ ਰਹੇ ਨੇ ਲੋਕ ਤੇ ਸਾਖਤ ਨਹੀਂ ਸਾਖਦੈਂ ਦੀ ਮਤ ਹੈ ਤੇ ਉਹ ਵੀ ਕਰਦੇ ਨੇ ਜਨਨ ਨੂੰ ਫੜਾ ਦਿੰਦੇ ਨੇ ਹਿਲ ਨੂੰ ਵਿਚਾਲੇ ਛੜਤਾਂ ਲਿਆ ਰਹੇ ਜਿੱਤੇ ਹਿਲ ਚੋਗਲੇ ਆਉਂਦੇ ਨੇ ਉਹ ਆਹ ਨਾਲੇ ਵਿਚਾਲਾ ਆ ਜਾਂਦੇ ਕੇ ਭੱਜ ਕੇ ਉਹਨਾਂ ਨੂੰ ਜਾਲਿਸ਼ ਫਸ ਜਾਂਦੇ ਉਹ ਹਿਲ ਨੂੰ ਦੂਜਿਆਂ ਨੂੰ ਮਾਰ ਕੇ ਖਾ ਲੇ ਇਵੇਂ ਬਾਜ ਆਏ ਉਹ ਬਾਜ ਦੇ ਤੂੰ ਦੇਖ ਕੇ ਦੂਆ ਬਾਜ ਆ ਜੇ ਨਾ ਦੂਰ ਫੜਕੜਵਾ ਦੋ ਉਹ ਆਪਣੇ ਬੰਦੇ ਨੂੰ ਦੇਖ ਕੇ ਆ ਜਾਂਦਾ ਦੂਰ ਫਸ ਜਾਂਦਾ ਇਵੇਂ ਭੀੜ ਇਕੱਠੀ ਕਰਦੇ ਨੇ ਸੰਤ ਲੋਕਾਂ ਦੀ ਮੰਦੇ ਨਾਲ ਜੋੜੇ ਨੇ ਹੋਰ ਪੀੜਤ ਕਰਕੇ ਅਣਜਾਣ ਆਦਮੀਆਂ ਨੂੰ ਫਸਾ ਕੇ ਆਪਣੇ ਉਲਟੀ ਸੱਖਿਆ ਦੇਈ ਜਾਂਦੇ ਨੇ ਇਹ ਤਿੰਨੇ ਕੋਈ ਕੰਮ ਕਰ ਰਹੇ ਨਹੀਂ ਦੋ ਦਾ ਜਾਨਵਰ ਨੇ ਨਰਵਾਜ ਕੋਈ ਕੰਮ ਸੰਤ ਕਰ ਰਹੇ ਨੇ ਸਾਖਤ ਕਰ ਰਹੇ ਨੇ ਅੱਖੇ ਕਰਕੇ ਬੰਦੇ ਪਿੱਛੇ ਲਾ ਕੇ ਜਬਦੇ ਗਾਲ ਫਸਾਈ ਜਾਂਦੇ ਨੇ ਮੁਕਤੀ ਦੀ ਸਿੱਖਿਆ ਨਹੀਂ ਦਿੰਦੇ ਚਾਰ ਪਦਾਰਥ ਦੀ ਸਿੱਖਿਆ ਨਹੀਂ ਦਿੰਦੇ ਜਦਨੇ ਗਾਲ ਫਸਾਈ ਜਾਂਦੇ ਆਇਆ ਦੇ ਮੋਜ ਫਸਾਈ ਜਾਂਦੇ ਦਰਵਾਜ਼ੇ ਵਿੱਚ ਇਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਰਾਦੀ ਦੇ ਦਰਗਾਹ ਦੇ ਦਾ ਜਗ੍ਹਾ ਕਿ ਬਰਾਦੀ ਦੇ ਲੋਕ ਹਾਂਜੀ ਪਿਛਲੀ ਪੌੜੀ ਵਿੱਚ ਹਾਥੀ ਰਾ ਤੇ ਚਿੜੀ ਦਾ ਵੀ ਇਸ ਤਰ੍ਹਾਂ ਹੀ ਹੋਇਆ ਸੀ ਹਾਂਜੀ ਹਾਂਜੀ ਤੇ ਇੱਥੇ ਫਿਰ ਹਰਨਾ ਬਾਜਾਂਵਾਲ ਵੀ ਇਸ਼ਾਰਾ ਤਾਂ ਬੰਦੇ ਨੂੰ ਕੀਤਾ ਹੈ ਜੀ ਬੰਦੇ ਨੂੰ ਇਹ ਉਪਦੇਸ਼ ਹਰਨਾ ਬਾਜਾਂ ਦਾ ਵਿਚਾਰਾਂ ਦੇ ਵਿੱਚ ਨਾ ਲਿਆ ਹਰ ਤਾਂ ਜੇ ਫਸਾ ਦਿੰਦੇ ਨੇ ਮਾਰ ਕੇ ਖਾ ਲੈਂਦੇ ਨੇ ਮੁਕਤੀ ਹੋ ਜਾਂਦੀ ਹੈ ਹਰ ਨੇ ਕਿਹਾ ਤਾਂ ਐਲਲ ਵੀ ਗੱਲ ਨਹੀਂ ਹੈ ਇੱਕ ਜਾਨਵਰ ਦੀ ਮੁਕਤੀ ਉਹ ਹੈ ਪਰ ਆਦਮੀ ਨੇ ਤਾਂ ਗਿਆਨ ਪੜਨਾ ਹੈ ਜਿਹਨੂੰ ਗਿਆਨ ਪੜਨ ਤੋਂ ਰੋਕ ਦੇਣ ਇਹਦੀ ਬੁੱਧੀ ਨਾ ਡਿਵੈਲਪ ਹੋ ਕੇ ਬੇਬੁੱਧੀ ਪਾਣ ਇਹਨੂੰ ਰੋਕ ਦੇਣ ਬਹੁਤ بڑا ਅਪਰਾਧ ਹੈ ਠੀਕ ਹੈ ਜੀ ਤੇ ਇੰਨਾ ਪੜਿਆ ਨਾਉ ਆਇਆ ਇੱਥੇ ਨਾਉ ਇਹਨਾਂ ਨੂੰ ਪੜਨ ਦੀ ਚੀਜ਼ ਹੈ ਜੀ ਅੜ ਕੇ ਜੋ ਗਿਆਨ ਮਿਲਦਾ ਉਹ ਹੀ ਤਾਂ ਲੋ ਠੀਕ ਹੈ ਇਹ ਕੋਈ ਜਪਣ ਜਾਂ ਰਟਣ ਵਾਲੀ ਚੀਜ਼ ਨਹੀਂ ਹੈ ਜੀ ਇਸੇ ਕਰਕੇ ਤਾਂ ਪੜਿਆ ਲਿਖਿਆ ਫਿਰ ਵੀ ਨਹੀਂ ਅੜਦੇ ਉਹ ਫਿਰ ਵੀ ਤਾਂ ਉਹੀ ਗਏ ਜਾਂਦੇ ਨੇ ਇਹਨਾਂ ਕੋਲਲੇ ਜਿਹੜੇ ਬਾਅਦ ਇਹ ਤਾਂ ਮਨਾਂ ਜਾਣ ਕੇ ਕਰਦੇ ਨੇ ਉਹ ਫਸਾਉਣ ਦਾ ਲੋਕਾਂ ਨੂੰ ਠੀਕ ਹੈ ਜੀ ਇਸ਼ਾਰਾ ਦਿੱਤਾ ਸੀ ਕਿ ਨਾਉ ਪੜਨ ਵਾਲੀ ਚੀਜ਼ ਹੈ ਪਰ ਅਸੀਂ ਉਹਨੂੰ ਰਟਣ ਲੱਗ ਗਏ ਜੀ ਹਾਂ ਸੋ ਪੜਿਆ ਸੋ ਪੰਡਿਤ ਬੀਨਾ ਜਿੰਨੀ ਕਮਾਣਾ ਨਾਉ ਪਹਿਲੇ ਦੇ ਜੜ ਅੰਦਰ ਜਮੈ ਤਾਂ ਉੱਪਰ ਹੋਵੇ ਛਾਉ ਬਹੁਤ ਪੜਿਆ ਉਹੀ ਐ ਬੀਨਾ ਸੁੰਦਰ ਉਹੀ ਐ ਜਿਹਨਾਂ ਨਾਮ ਦੀ ਕਮਾਈ ਕੀਤੀ ਜਿਹਨ ਆਤਮ ਗਿਆਨ ਲਿਆ ਆਤਮ ਗਿਆਨ ਦੀ ਜਿਹਨੇ ਕਰੇ ਕਮਾਈ ਕੀਤੀ ਐ ਆਤਮ ਸਮਝਿਆ ਉਹ ਬੀਨਾ ਸੁੰਦਰ ਪੰਡਤ ਆ ਉਹ ਜਿਹਦੇ ਕਮਾਣੇ ਜਿਹਨੇ ਨਾਮ ਨਹੀਂ ਕਮਾਇਆ ਪਹਿਲਾਂ ਦੇ ਜਲ ਅੰਦਰ ਜੰਮੈ ਪਹਿਲਾਂ ਤਾਂ ਅੰਦਰ ਜੰਮਦਾ ਹੈ ਗਿਆਨ ਪਹਿਲਾਂ ਅੰਦਰ ਸਮਝਦਾ ਆ ਅੰਦਰ ਬਸੂਦ ਹੈ ਗਿਆਨ ਨੂੰ ਫਿਰ ਜਦ ਜਲ ਫੜ ਜਾਂਦਾ ਹੈ ਗਿਆਨ ਬੰਨ ਲੈਂਦਾ ਆਦਮੀ ਜਲ ਫੜ ਜਾਂਦਾ ਫਿਰ ਅੰਦਰ ਜੰਮਦਾ ਗਿਆਨ ਤਾਂ ਉੱਪਰ ਛਾਉਂਦੀ ਹੈ ਫਿਰ ਫੜ ਲੱਗਦੇ ਨੇ ਫਿਰ ਬੋਲਣ ਲੱਗਦਾ ਉਹ ਫਿਰ ਲੋਕਾਂ ਨੂੰ ਗਿਆਨ ਫੜ ਦਿੰਦਾ ਤੁਸੀਂ ਤਾਂ ਅੰਦਰ ਤੋਂ ਤੁਹਾਡੇ ਗਿਆਨ ਹੋਈ ਦੀ ਬੱਲੇਈ ਦੀ ਜਮੇਈ ਦੀ ਫਾਲਕਾ ਤੋਂ ਦੇ ਦੋਗੇ ਠੀਕ ਹੈ ਪਹਿਲੋ ਲਿਖਿਆ ਜਿਵੇਂ ਸੇ ਪਹਿਲੋ ਦੇ ਜੜ ਅੰਦਰ ਜੰਮਾ ਤਾਂ ਉੱਪਰ ਹੋਵੇ ਛਾਉ ਸਭ ਤੋਂ ਪਹਿਲਾਂ ਹੁਣ ਅੰਦਰ ਜੜ ਜੰਮਦੀ ਆ ਮੰਨ ਲੇਦੇ ਆ ਠੀਕ ਹੈ ਮੈਂ ਭਾਵੇਂ ਵੀ ਜੜ ਤਾਂ ਜੰਮੂ ਵੀ ਇੱਕ ਹੋਊਗਾ ਇੱਕ ਹੋਏ ਬੀਜ ਦੀ ਠੀਕ ਹੈ ਤਾਂ ਹੀ ਤਾਂ ਇੱਕ ਕਰੂਗਾ ਇਹ ਗਿਆਨੇ ਕ ਕਰੂਆ ਗਿਆਨ ਕਾ ਬੱਦਾ ਬੰਦਾ ਹੈ ਠੀਕ ਹੈ ਜੀ ਨੇ ਆਇਆ ਨਾ ਸੋ ਪੜਿਆ ਸੋ ਪੰਡਿਤ ਬਿੰਨਾ ਜਿੰਨੀ ਕਮਾਣਾ ਜਿੰਨੇ ਨੋਂ ਕਮਾ ਲਿਆ ਉਹ ਫਿਰ ਇੱਕ ਹੋ ਗਏ ਉਹਨਾਂ ਦੇ ਅੰਦਰ ਜੜ ਜੰਮੀ ਐ ਫਿਰ ਉਹ ਬਿਰਛ ਰੂਪ ਬਿਲਕੁਲ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਉਣ ਸੰਸਾਰ ਦੇ ਜੰਗਲ ਦਾ ਮਾਲਕ ਜਿਹਨੂੰ ਮਰਜ਼ੀ ਖਾਲਵੇ ਜਿਹਨਾਂ ਮਰਜੀ ਇਹਨੇ ਮੈਂ ਕਹਿ ਲਿਆ ਜਿਹਦੇ ਮਰਜੀ ਖੋਲ ਬੈਜੀ ਤਾਂ ਕਬਜਾ ਕਰ ਲਵੇ ਉਹਨੂੰ ਕੋਈ ਜਵਾਬ ਤਾਂ ਦੇ ਨਹੀਂ ਸਕਦਾ ਰਾਜੇ ਜੀ ਨੇ ਮਗਦਮ ਕੁੱਤੇ ਨੇ ਉਹਨਾਂ ਦੇ ਨਾਲ ਥੋੜਾ ਬੋਧਾ ਬਚਿਆ ਕੁਝ ਉਹ ਖਾ ਲੈਂਦੇ ਨੇ ਆਦਾ ਕੁਝ ਹੋ ਰਿਹਾ ਪਰ ਤਾਂ ਪਲੰਘ ਹੁੰਦਾ ਜੀ ਦੀ ਉਹ ਇਹ ਕੰਬਲੀ ਕਰਦਾ ਹੁੰਦਾ ਉਹਨਾਂ ਨੂੰ ਕੁੱਤੇ ਆਲਾ ਆਲਾ ਮਹਲਾ ਨਹੀਂ ਕਰਦਾ ਹਾਂ ਤਾਂ ਆਪਣੀ ਪਬਲਿਕ ਤੇ ਚਾਹੇ ਜਗਾਂ ਵਿੱਚ ਬੈਠੇ ਸੁੱਤੇ ਜਿਹੜੇ ਕੁੱਤੇ ਨੇ ਜੇ ਰਾਜਾ ਸੁਤਾ ਵੀ ਹੋਵੇ ਜਗਾਦੰਨ ਨੇ ਭਲਾਨੇ ਕੋਈ ਨਹੀਂ ਪੈਸੇ ਨੇ ਟੈਕਸ ਨਹੀਂ ਦਿੰਦਾ ਉਹ ਨਹੀਂ ਦਿੰਦਾ ਚੁਗਲੀਆਂ ਕਰਦੇ ਨੇ ਸੁਜੀ ਚੱਕਰ ਨਹੀਂਦਾ ਪਾਇਨ ਘਾਉ ਰਤ ਪਿਤ ਕੁੱਟਿਓਂ ਛੱਟ ਜਾਓ ਚੱਕਰ ਨਹੀਂਦਾ ਪਾਇਨ ਨੇ ਜਿਹੜੇ ਉਹ ਨਾ ਨਾ ਉਹਨਾਂ ਨਾਲ ਕਹਾਉ ਕਰਦੇ ਨੇ ਭਾਂਨ ਕਾਓ ਰਤ ਪਿਤ ਕੁੱਤੇ ਉਹ ਚੱਕ ਜਾਓ ਮੇਰੇ ਰਤ ਉਹ ਦੁੰਦੀ ਡਲਦੀ ਹੈ ਉਹ ਕੁੱਤੇ ਚੱਕ ਜਾਂਦੇ ਨੇ ਵਿਚਾਰੇ ਕਿਉਂ ਇੱਧਰ ਉੱਧਰ ਧਰਤੀ ਤੇ ਡਿੱਗ ਜਾਂਦੀ ਹੈ ਰਤ ਬਾਈ ਸਾਹ ਖੋਦਾ ਕੁੱਤੇ ਖਾਣਦੇ ਨੇ ਬੋਟਾ ਮੋਟਾ ਸ਼ੇਰ ਖਾਣਦਾ ਮੈਂ ਇੱਥੇ ਚੱਕ ਕੇ ਆਇਆ ਚੱਕਰ ਤਾਂ ਕੋਈ ਕੁੱਤੇ ਨਾਲੋਂ ਵੀ ਛੋਟਾ ਲੱਗਦਾ ਅੰਦਰ ਲਾਈਕ ਉਪਾਰ ਕੇ ਨਾ ਅੰਦਰ ਦਾ ਪਾਣੀ ਬੂੜੀਆਂੋਂ ਜ਼ਿਆਦਾ ਪੀਤਾ ਹੁੰਦਾ ਜਾਂਦਾ ਚੰਗਾ ਚੰਗਾ ਮਾਸ ਕਰਦਾ ਹੁੰਦਾ ਅੱਛਾ ਬਹੁਤਾ ਨਹੀਂ ਖਾ ਖਾਦਾ ਤੇ ਮੁਕਦਮਾ ਤੋਂ ਛੋਟੇ ਚਾਕਰ ਹੁੰਨੇ ਆ ਜੀ ਹਾਂ ਹਾਂ ਇਹ ਕਲਾਸ 3 ఎంਪਲੋਏ ਹੋਣਗੇ ਜੀ ਰਾਜਾ ਦਾ ਕਲਾਸ 1 ਹੋ ਗਿਆ ਮੁਕਦਮਾ ਕਲਾਸ 2 ਹੋ ਜੀ ਆ 2 ਹੋਗੇ ਨਾਲ ਦੇ ਬੜੇ ਨੇ ਨਾਲ ਦੇ ਸੈਨਾਪਤੀ ਚਾਕਰ ਨਹੀਂ ਇਹ ਕਲਾਸ 3 ਹੈ ਜੀ ਚਾਕਰ ਨਹੀਂ ਆਇਨ ਕਾ ਰੱਤ ਪਿੱਤ ਕੁੱਤਿਓਂ ਛੱਟ ਜਾਓ ਆਹੋ ਨੋਹਾਂ ਨਾ ਵਿਚਾਰੇ ਇਧਰ ਉਧਰੋਂ ਜਿੱਦਾਂ ਮਿਲਦਾ ਟੋੜ-ਥੜ ਕੇ ਹੱਡੀਆਂ ਨੂੰ ਨੋਹਾਂ ਨਾ ਖੂਨ ਨੇ ਆਹ ਜੀਆ ਹੋਸੀ ਸਾਰ ਨੱਕੀ ਵੱਡੀ ਲਾਇਤ ਬਾਤ ਕੋਈ ਜੀ ਹੈ ਉੱਥੇ ਗਿਆਨ ਵੀ ਹੈ ਜੇ ਜੀ ਹੈ ਉਹਦਾ ਗਿਆਨ ਹੈ ਉੱਥੇ ਨੱਕੀ ਵੱਡੀ ਲਾਇਤ ਪਰ ਜਿਹੜੀ ਨੱਕੀ ਵੱਡੀ ਐ ਉਹਦੀ ਗੱਲ ਜਿਹੜੀ ਹੈਗੀ ਐ ਐਤਵਾਰ ਵਾਲੀ ਦੀ ਜਿਹਨੇ ਨੱਕੀ ਵੱਡ ਲਿਆ ਜਿਹਨੇ ਸਾਚੀ ਛੁਪਾ ਲਿਆ ਸਾਚ ਨੂੰ ਛੁਪਾ ਲੈਣਾ ਨੱਕ ਵੱਡ ਲੈਣ ਉਹਦਾ ਐਤਵਾਰ ਦੀ ਕੀਤਾ ਜਾ ਮਤਲਬ ਹੈਗੇ ਨੇ ਉੱਥੇ ਗਿਆਨ ਹੈਗਾ ਨੱਕ ਵੱਡ ਨਾਲ ਕੋ ਗਿਆਨ ਨੱਕ ਵੱਡੀ ਕੋ ਗਿਆਨ ਦੀ ਹੁੰਦਾ ਕੀ ਕੋਲ ਦਾ ਗਿਆਨ ਹੈ ਨਕ ਕਬੱਡੀ ਵਾਲਾ ਗਿਆਨ ਆਤਮਾ ਵਾਲਾ ਗਿਆਨ ਨਹੀਂ ਹੈ ਅੰਤਰਾਤਮਾ ਨਕ ਕਬੱਡੀ ਦੇ ਗਿਆਨ ਤੇ ਆਤਮਾ ਨਹੀਂ ਕਰਦੀ ਫਸਲ ਅੰਤਰਾਤਮਾ ਕੋਲ ਗਿਆਨ ਹੈ ਉਹ ਜਨਤ ਸਾਬਾ ਜਾਣਦੀ ਯੋਗਨ ਕਰੇ ਬਹੁਤ سارے ਸੰਤਾਂ ਦਾ ਗਿਆਨ ਲੋਕ ਜਿਹੜੀ ਗੱਲ ਦਾ ਉਹ ਤੇ ਸਵਾਲ ਨਹੀਂ ਲੋਕ ਕਰਦੇ ਕੁਝ ਆਦਮੀ ਨੇ ਜਿਹੜੇ ਅੰਨੇ ਹੋ ਕੇ ਸਵਾਲ ਕਰ ਲੈਂਦੇ ਨੇ ਭਾਵੇਂ ਅੰਦਰੋਂ ਉਹ ਨਹੀਂ ਚਾਹੁੰਦੇ ਲਾਟਵਾਰ ਦਾ ਬੁੱਤਲ ਵੇ ਆਹ ਓਤਵਾਰ ਦੇ ਯੋਗ ਨਹੀਂ ਆਮ ਆਦਮੀ ਵੀ ਓਤਵਾਰ ਦੇ ਯੋਗ ਉਹਦੀ ਗੱਲ ਨਹੀਂ ਬੁੱਤਾਂ ਇਹ ਨੱਕੀ ਵੱਡੀ ਆਲੇ ਕੌਣ ਹੈ ਜੀ ਅੱਕੀ ਵੱਡੀ ਆਲੇ ਦਾ ਸ਼ਰਮ ਹੈ ਆਦਮੀ ਝੂਠ ਬੋਲਦਾ ਨਹੀਂ ਹੈ ਜਿਹਨਾਂ ਨੇ ਝੂਠ ਬੋਲਣ ਦੀ ਝੂਠਾ ਮੈਨੂੰ ਕੋਈ ਕਹਿ ਦੂਗਾ ਮੇਰੇ ਮੂੰਹ ਤੇ ਮੇਰਾ ਝੂਠ ਸਾਫ਼ ਤੋਂ ਹੋ ਜੂ ਉਹ ਡੱਕੀ ਵੱਡੀ ਦੇ ਬੇਹਾਰ ਬੀਜ ਆਪਾਂ ਕਹਿ ਦਿੰਦੇ ਹਾਂ ਠੀਕ ਹੈ ਜੀ ਪਰ ਇਹ ਗੱਲ ਕੀ ਬਣੀ ਜਿੱਥੇ ਜੀਆਂ ਹੋਸੀ ਸਾਰ ਨੱਕੀ ਵੱਡੀ ਲਾਇਤbaar ਜਿੱਥੇ ਜੀਆਂ ਨੂੰ ਅਕਲ ਹੁੰਦੀ ਆ ਉਥੇ ਨੱਕੀ ਵੱਡੀ ਦਾ ਕੋਈ ਇਤਵਾਲ ਨਹੀਂ ਕਰਦਾ ਠੀਕ ਹੈ ਬਸ ਜਿਹੜਿਆਂ ਨੂੰ ਹੁਣ ਸਾਰ ਨਹੀਂ ਹੈਗੀ ਐ ਉਹ ਕਰ ਲੈਂਦੇ ਅੱਛਾ ਉਹ ਠੱਗੇ ਵੀ ਜਾ ਰਹੇ ਹੈ ਜੀ ਉਹ ਠੱਗੇ ਵੀ ਜਾ ਰਹੇ ਠੀਕ ਹੈ ਜੀ ਪੌੜੀ ਆਪ ਉਪਾਏ ਮੇਜਣੀ ਆਪੇ ਕਰਦਾ ਸਾਰ ਭੈ ਬਿਨ ਭਰਮ ਨਾ ਕੱਟੀ ਐ ਨਾਮ ਮੇਨ ਲੱਗਿਆ ਪਿਆਰ ਆਪੋ ਬਾਇ ਮੈਦਲੀ ਤੇਰੇ ਆਪੇ ਤੇਰੇ ਦਿੱਤੀ ਜਾਂਦੇ ਆਪੇ ਕਰਦਾ ਸਾਰ ਇਹਦੀ ਦੇਖਭਾਲ ਵੀ ਆਪੇ ਕਰਦਾ ਹੋ ਕਿਤੇ ਵੀ ਪਾਉਣਾ ਤੁਪ ਚਾਹੀਦੀ ਐ ਨਹੀਂ ਚਾਹੀਦੀ ਕੀ ਚਾਹੀਦਾ ਮੌਸਮ ਬਦਲ ਲੈਨੇ ਭੈ ਬਿਨ ਪਰਮਾ ਨਾ ਕੱਟਿਏ ਪੈਦਾ ਬਿਨ ਪਰਮਾ ਨਹੀਂ ਕੱਟਿਆ ਜਾਂਦਾ ਐਵੇਂ ਪਰਮ ਨਾ ਕੱਟਿਆ। ਨਾਮ ਨਾ ਲਗਾਤਾ, ਨਾਮ ਨਾਲ ਪਿਆਰ ਨਹੀਂ ਲੱਗਦਾ। ਐ ਤੋ ਆਦਮੀ ਡਰਦਾ ਹੈ, ਆਹ ਪਰਮ ਤੋਂ ਡਰਦਾ। ਡਰਦਾ ਪਰਮ ਕਟਾਉਂਦਾ। ਪਰਮ ਕੱਟੇ ਦੇ ਬਾਅਦ ਡਰ ਪੈ ਹੋ ਜਾਂਦਾ। ਐਵੇਂ ਪਰਮ ਨੂੰ ਕੱਟਿਆ। ਜੇ ਪਰਮੇਸ਼ਰ ਦੇ ਪਾਏ ਦੇ ਵਿੱਚ ਨਹੀਂ ਰਹਿੰਦਾ, ਪਰਮੇਸ਼ਰ ਦੇ ਪਾਣੀ ਚ ਨਹੀਂ ਚੱਲਦਾ, ਪਰਮ ਨਹੀਂ ਕਟਿਆ ਜਾਂਦਾ। ਨਾ ਨਾਮ ਨਾਲ ਪਿਆਰ ਲੱਗਣਾ। ਹਾਂਜੀ। ਸਤਿਗੁਰ ਤੇ ਭਉ ਉਪਜੈ ਪਾਈਐ ਦਵਾਰ ਭੈ ਤੇ ਸਹਿਜ ਪਾਈਐ ਮਿਲ ਜੋਤੀ ਜੋਤਿ ਅਪਾਰ ਸਤਿਗੁਰ ਦੀਆਂ ਗੱਲਾਂ ਦੇ ਜੋ ਇਹ ਸਮਝ ਆਉਂਦੀ ਹੈ ਭਾਈ ਭਾਣੇ ਚੱਲਣ ਜਿਹੜਾ ਹੈਗਾ ਇਹ ਸੁਖਦਾਈ ਹੈ ਇਹਦੇ ਚ ਸੁਖ ਹੈ ਵਿੱਚ ਬਹੁਤ ਬੈਠਾ ਹੈ ਤਾਂ ਕੋ ਪਹਿਜੋ ਦਉ ਉਪਜੈ ਪਾਈਐ ਮੋਖ ਮੋਖ ਦੇ ਦਵਾਰ ਆ ਪਾ ਲਈਦਾ ਫਿਰ बहुत ਵਿੱਚ ਬਹਿ ਜਾਈਦਾ ਹੈ। ਜਾਚ ਵਿੱਚ ਬਹਿ ਜਾਈਦਾ ਹੈ ਮੁਕਤੀ ਮਿਲਦੀ। ਭੈ ਤੇ ਸਹਿਜ ਪਾਈਐ ਮਿਲ ਜੋਤੀ ਜੋਤਿ ਪਾਰ। ਮਨ ਨੂੰ ਕਹਿਆ ਜੇ ਤੂੰ ਅਟ ਰਹੇਂ ਹਾ ਨਾ ਜੇ ਨਾ ਜੁ ਤੂੰ ਅਟ ਰਹੇਂ ਆਪਣੇ ਮੂਲ ਤੋਂ ਤਾਂ ਡਰ ਹੈ। ਮੂਲ ਦੇ ਨਾਲ ਜੁੜਿਆਦਾ ਕੋਈ ਡਰੇ ਨਹੀਂ। ਅਪੂਰਨ ਨਾਲ ਜੁੜ ਜੂਗਾ ਪਵਗਲ ਦੇ ਵਿੱਚ ਪਾਇਆ ਹੈ ਪਾਣੀ ਪਵਸ਼ਾ ਲੰਮਣ ਦੀ ਲੋੜ ਹੈ ਪਰੇ ਜਾਣ ਦੀ ਲੋੜ ਹੈ ਇਹ ਕਰਕੇ ਹੀ ਪਵਜਾ ਲੂਣ ਗਿਆ ਜਾਂਦਾ ਗੁਰਮਤਿ ਵਿਚਾਰ ਗੁਰਮਤਿ ਵਿਚਾਰ ਨੂੰ ਅਪਣਾ ਕੇ ਗੁਰਮਤਿ ਦੇ ਵਿਚਾਰ ਨੂੰ ਸਮਝ ਕੇ ਕਿਵੇਂ ਲੰਗਣ ਕਿਵੇਂ ਲੰਗਿਆ ਜਾਊਗਾ ਇਹ ਗੁਰਮਤਿ ਦੇ ਦਰਸ਼ਨ ਹੈ ਤੇ ਨਿਰਪੋ ਪਾਈ ਹੈ ਜਿਸ ਦਾ ਅੰਤ ਨਾ ਪਾਰਾ ਵਾਰ ਤੇ ਨਿਰਪੋ ਐ ਤੇ ਬਾਦ ਫਿਰ ਪਰਵਾਸ ਆ ਬੈ ਲਉਂਦੇ। ਨਿਰਪੋ ਹੈ। ਨਿਰਪੋ ਕੌਣ ਨੇ ਨਿਰਪੋ ਤੇਰਾ ਹੂੜ ਹੈ। ਨਿਰਪੋ ਦੇ ਨਾਲ ਜੁੜ ਜਾਈਦਾ। ਜਿਸ ਦਾ ਤਰ੍ਹਾਂ ਪਾਰਾ ਬਾਲ ਉਹਦਾ ਕੋਈ ਹੱਦ ਹੈ। ਉਹ ਸਦਾ ਸਦਾ ਸਤਗੁਰੂ ਨਾ ਜਾਏ ਉਹ ਨਾਸ਼ੀ ਪਰਖ ਹੈ। ਸਭ ਮੇਰੇ ਹੱਥ ਹੈ। ਉਹ ਤਾਂ ਤਰ੍ਹਾਂ ਪਾਰਾ ਬਾਲ। ਉਹਦੇ ਨਾਲ ਜੁੜ ਜਾਈਦਾ। ਉਹਦਾ ਹੀ ਰੂਪ ਹੋ ਜੀਦਾ। ਫਿਰ ਭੈਂ ਦੀ ਰਹਿੰਦੀ। ਜੰਮਣ ਮਰਨ ਖਤਮ ਹੋ ਜਾਂਦਾ। ਹੋ मनमुख पै की सार ना जाननी किसना जलते करे पुकार नानक नाम हीते सुख पाया गुरमति पुरतार मनमुख पै की सार ना जानली मनमुख ने पै दी सार दी जानी जाननी ओ ही नहीं मनमुख दे जि नजर मनमुख आ जान नहीं सकदा जाननी, ਤੇ ਜਿਸਨਾਂ ਨੇ ਜਲਤੇ ਕਰਿਆ ਕੋਕਾਰ ਤ੍ਰਿਸ਼ਨਾਂ ਦੀ ਅਗ ਵਿੱਚ ਜਲਦੇ ਚੀਕਾ ਨਾ ਮਾਰੀ ਜਾਂਦੇ ਨੇ ਪਰ ਭੈ ਦੀ ਹਾਲ ਦੀ ਜਾਨ ਜਾਂਦੇ ਨਾਨਕ ਨਾਵੇ ਹੀ ਤੇ ਸੁਖ ਪਾਇਆ ਨੰਦ ਕਹਿੰਦਾ ਤੇ ਹੀ ਐ ਗੁਰਬਾਣੀ ਦੇ ਗਿਆਨ ਤੇ ਹੀ ਗੁਰਬਾਣੀ ਦੇ ਦੀ ਸੋਚੀ ਤੋਂ ਹੀ ਸੁਖ ਪਾਇਆ ਜਿਹੜੇ ਵੀ ਪਾਇਆ ਅਸੀਂ ਵੀ ਪਾਇਆ ਸਭ ਨੇ ਪਾਇਆ ਕੋਈ ਵੀ ਪਾ ਸਕਦਾ ਹਾਂ ਗੁਰਮਤੀ ਹੋਰ ਗੁਰਮਤਿ ਨੂੰ ਹਿਰਦੇ ਵਿੱਚ ਵਸਾ ਕੇ ਗੁਰਮਤਿ ਨੂੰ ਹਿਰਦੇ ਵਿੱਚ ਵਸਾ ਕੇ ਤਾਂ ਸੁਖ ਮਿਲੇ ਠੀਕ ਹੈ ਜੀ ਇੱਥੇ 22ਵੀਂ ਪੌੜੀ ਦੀ ਸਮਾਪਤੀ ਹੈ ਜੀ ਰੋ